ਸ਼ੇ ਮਹਲਾ ਮਹੱਲਾ ਪਹਿਲਾ ਹੁਕਮ ਰਜ਼ਾਈ ਸਾਖਤੀ ਦਰਗਾ ਸਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨ ਭੂਲ ਮਹਗੁਬਦੀ ਰਜ਼ਾ ਬੇ ਚਲਣਾ ਇਹੋ ਜੁਖੀ ਹੈ ਓਖੀ ਖੇੜ ਹੈ ਸਤਖੇੜ ਸ਼ਕਤੀ ਨਾਲ ਬੰਨੂ ਬੁਨਾਵੈ ਤਾਂ ਹੁਕਮ ਬੜਾ ਔਖਾ ਦਰਗਾਹ ਸਾਹਿਬ ਕਬੂਲ ਦਰਗਾਹ ਦੇ ਸਾਥੀ ਦਰਗਾਹ ਜੀ ਕਬੂਲ ਹੁਕਮ ਦੇ ਵਿੱਚ ਰਹਿਣਾ ਸੱਚ ਨੂੰ ਤਸਲੀਮ ਕਰਕੇ ਹੀ ਰਹਾ ਜਾ ਸਕਦਾ ਹੈ ਜੇ ਹੀ ਹੁਕਮ ਦੇ ਵਿੱਚ ਰਹਿਣਾ ਸਕੇ ਜਿਹੜਾ ਇਹ ਕਬੂਲ ਹੈ ਜੇ ਵਕਾਈ ਹੁਕਮ ਦੇ ਕਬੂਲ ਹੈ ਸਾਇਵ ਲੇਖਾ ਭਗਣਾ ਦੁਨੀਆ ਦੇਖਣਾ ਕਬੂਲ ਸਾਹਿਬ ਨੇ ਲੇਖਾ ਭਗਣਾ ਦੁਨੀਆ ਦੇਖ ਕੇ ਭੁੱਲ ਜਾ ਕੋਈ ਕੀ ਕਰਕੇ ਆਏ ਕੀ ਕਾ ਮੰਗਿਆ ਸੀ ਕੀ ਲੈ ਕੇ ਆਇਆ ਕੀ ਲੈਣ ਗਿਆ ਸੀ ਇਹ ਜਵਾਬ ਚਾਹੀ ਵੀ ਹੈ ਦੁਨੀਆਂ ਨੂੰ ਦੇਖ ਜਵਾਬ ਦੇਣਾ ਪੈਣਾ ਠੀਕ ਜੀ ਜਿਹੜੇ ਕਹਿੰਦੇ ਆ ਇਹ ਜੱਗ ਸਾਗਲਾ ਕੀਨੇ ਡਿੱਠਾ ਵਾਸਤੇ ਇਹ ਵਾਰਨਿੰਗ ਹੈ ਜੀ ਹਾਂਜੀ ਹਾਂਜੀ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਜਿਹੜਾ ਆਪਣੇ ਦਿਲ ਨੂੰ ਕਰ ਲੈ ਬਿਲਕੁਲ ਖੁੱਲਾ ਖੁੱਲ ਦੇਣਾ ਹੋ ਜੀ ਨਾ ਬਈ ਨਾ ਪਕਾ ਆਜੀ ਹਿੰਦੂ ਆਜੀ ਗੁਰਸਪੁਰ ਆਜੀ ਉਹ ਹੈ ਆ ਮੈਂ ਖਾਣਾ ਆਦ ਨਹੀਂ ਖਾਣਾ ਇਹ ਬਹੁਤ ਤੰਗ ਨਾ ਰੱਖੇ ਖੁੱਲ ਦੇਣਾ ਹੋਵੇ ਕਿਉਂ ਕਰੇ ਦਰਵੇਸੀ ਦਿਲ ਆਸ ਉਹੀ ਦਰਵੇਸੀ ਤਰਪੁੰਚ ਦੇ ਉਹਦਾ ਹੀ ਦਿਲ ਰਾਸ ਆ ਸਦਰਾ ਦਰਵੇਸ਼ੀ ਨੂੰ ਉਹਦਾ ਕਬੂਲ ਕਰਦਾ ਦਰਵੇਸ਼ ਕਹਿੰਦਾ ਨਾ ਉਹਦੇ ਦਰ ਦੇ ਵਿੱਚ ਪ੍ਰਵੇਸ਼ ਆਲਾ ਬੇਸ ਬਣਾਓ ਇਹ ਸਰੀਰ ਛੱਡ ਕੇ ਮਾਇਆ ਤੋਂ ਉੱਪਰ ਉੱਠ ਧਾਰੀ ਦੀ ਬਣਾਈ ਹੋਈ ਹੈ ਜਿਹੜੇ ਮਾਇਆ ਦੇ ਵਿੱਚ ਵੀ ਇਹ ਜਾਤ ਪਾਤ ਵੀ ਮਾਇਆ ਧਾਰੀ ਦੀ ਬਣਾਈ ਹੋਈ ਹੈ ਜਿੱਥੇ ਜਿੰਨਾ ਜਰ ਉੱਤੇ ਉੱਠ ਗਿਆ ਮਾਇਆ ਤੋਂ ਇਹ ਸਾਹਿਬ ਇੱਕ ਪਿਤਾ ਇੱਕ ਮੇਰਾ ਕੰਮ ਤੇਲੀ ਤੋਂ ਉੱਪਰ ਉੱਡ ਜਾਂਦਾ। ਫਿਰ ਦੇਖ ਫਿਰ ਉਹ ਜ਼ਰਵੇਤੀ ਉਹਦੇ ਦਿਲ ਨੂੰ ਰਾਸ ਆਉਂਦੀ ਹੈ। ਚੰਗੀ ਲੱਗਦੀ ਹੈ। ਹਾਂ ਜੀ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਇਸ ਕਮਾਹ ਝੂਠਾ ਹੈ। ਕਿਹੜਾ ਬਹਾਨੇ ਕਰਦਾ ਠੀਕ ਕਰਦਾ ਖੁਦਾ ਦਾ ਰਸ ਤੇ ਮੁਹੱਬਤ ਇਹ ਲੈ ਸਾਹਿਬ ਕੋਲ ਜਾ ਕੇ ਆਪਣੇ ਪਤਾ ਲੱਗ ਜਾਂਦਾ। ਉਧਰ ਕਰ ਤੇਗਾ ਉਹਦੇ ਕੋਲ ਲੇਖਾ ਹੈਗਾ ਇਹਦਾ ਲੋਕਾਂ ਨੂੰ ਔਖਾ ਦਿੱਤਾ ਜਾ ਸਕਦਾ ਗਾਂ ਔਖਾ ਨਹੀਂ ਦਿੱਤਾ ਜਾ ਸਕਦਾ ਜੀ ਇਸ਼ਕ ਦੀ ਮੁਹੱਬਤ ਦਾ ਕੀ ਬੋਲੀ ਅੱਛਾ ਜੀ ਸਾਖੀ ਤੇ ਮਾਲਬੀਟਰ ਦੀ ਇਸ਼ਕ ਮੁਹੱਬਤ ਸਾਖੀ ਤੇ ਕੁਰਬਾਨ ਹੋ ਜਾਣਾ ਠੀਕ ਹੈ ਨਾਨਕਾ ਲੇਖਾ ਕਰਤੇ ਪਾਸ ਇਸ ਗੱਲ ਦਾ ਲੇਖਾ ਰਹਿੰਦਾ ਕਰਤੇ ਪਾਸ ਪੂਰਾ ਘਟ ਘੜ ਕੇ ਅੰਦਰ ਕੀ ਜਾਣਦਾ ਐ ਤੇ ਦੁਨੀਆ ਨੂੰ ਜੋ ਮਰਜੀ ਕਰੀ ਜੋ ਤੂੰ ਹਾਂ ਜੀ ਪਹਿਲਾ ਹਲਗਾ ਜੋਏ ਨਾਨਕ ਕੰਠ ਸੁਭਾਏ ਅਲਗ ਹੁੰਦਾ ਜਿਹੜਾ ਕਿਸੇ ਨਾਲ ਕੋਈ ਲਗਾਓ ਨਹੀਂ ਹੈ ਅਲਗ ਤਰ੍ਹਾਂ ਸਭ ਤੋਂ ਜਿਸ ਦੇ ਕੋਈ ਮਤਾਜਗੀ ਨਹੀਂ ਹੈ ਜਿਸ ਦੇ ਕੋਈ ਲੈਣ ਦੇਣ ਨਹੀਂ ਹੈ ਬਦੂ ਕਰੋ ਬਦੂ ਉੱਤੇ ਲਾ ਕੇ ਬਿਠਾ ਬਦੂ ਕਰੋ ਮਿੱਠੋ ਬੋਲਣਾ ਹੋਵੇ ਪਰ ਕਿਸੇ ਨਾਲ ਲਗਾਓ ਨਾ ਹੋਵੇ ਇਹ ਲਗਾਓ ਸਭ ਦੇ ਕੋ ਜੇ ਕੋਈ ਵਿਚੋ ਆਪਣਾ ਹੋਵੇ ਕੋਈ ਬੰਦਰ ਨਾ ਹੋਵੇ ਛਾਰਨ ਪਾਣ ਛਵਾਏ ਜਿੰਨੇ ਛਾਰਨ ਨੇ ਉਹਨਾਂ ਵਾਸਤੇ ਪਾਣੀ ਹੈ ਜਿੰਨੇ ਵੀ ਜੀਵ ਦੇ ਉਹਨਾਂ ਦਾ ਪ੍ਰਾਣ ਜੋ ਗੱਲ ਕਰੂਗਾ ਸਾਰਿਆਂ ਨੂੰ ਉਹ ਤੇ ਸ਼ਾਂਤੀ ਮਿਲੂਗੀ ਸਾਰਿਆਂ ਨੂੰ ਜੀਵਨ ਮਿਲੂਗਾ ਜਿੰਦੇ ਵੀ ਸਾਰੇ ਨਦੇ ਜੀਵਦੇ ਉਹਨਾਂ ਵਾਸਤੇ ਪਾਣੀ ਰੂਪ ਹੈ ਉਹ ਹਰ ਉਦਕ RAM ਉਦਕ ਹੈ ਉਹਦੇ ਕੋਲ ਹਾਂਜੀ ਕੀ ਇਹ ਹੀਰਾ ਵੇਦਿਆ ਨਾੜਕ ਕਟਿ ਸੁਆਇ ਹੀਰਾ ਹੀਰਾ ਨੂੰ ਵੇਦ ਇੱਕ ਹੀਰਾ ਹੈ ਦਾ ਹੀਰਾ ਦੂਜੇ ਦਾ ਵੀ ਬੰਨ ਹੀਰਾ ਉਹ ਹਰੀ ਘਰੇ ਤੋਂ ਹੀਰੇ ਨੂੰ ਵੇਦ ਸਕਦਾ ਨਾੜਕ ਕਟ ਸੁਆਇ ਕਾਂਢੇ ਦੇ ਵਿੱਚ ਸੋਭਾ ਵਾਲਾ ਹੀਰਾ ਉਹੀ ਹੁੰਦਾ ਜਦੋਂ ਬੱਤਿਆ ਜਾਂਦਾ ਜਿੰਨਾ ਕਿ ਇਹਦਾ ਵੇਦਿਆ ਨਹੀਂ ਜਾਂਦਾ ਉਹ ਜੇਰ ਕੱਟ ਹੋ ਕੇ ਲੜਕ ਲੜਕਦਾ ਵੀ ਆ ਜਾ ਕੇ ਕੱਟ ਦੇ ਵਿੱਚ ਚੰਗਿਆ ਦੀ ਜਾ ਸਕਦਾ ਕੰਢ ਦੀ ਥੋਬਾ ਨਹੀਂ ਬਣਦਾ ਜੇ ਜਾਇਆ ਨੀਰਾਈ ਕੱਟ ਤੇ ਐਵੇਂ ਮਨ ਹੈਗਾ ਇਹ ਵਿਦਿਆ ਜਾਣਾ ਚਾਹੀਦਾ ਚਿੱਤ ਦੁਆਰਾ ਜੀ ਹਾਂ ਫਿਰ ਇਹ ਦੇ ਕੱਟ ਦੇ ਠੀਕ ਹੈ ਜੀ ਸੱਚ ਉਹ ਬੋਲ ਸਕਦਾ ਹੈ ਸੱਚ ਬੜਾ ਔਖਾ ਹੈ ਇਹ ਜੇ ਕਰਨਾ ਦੂਏ ਦੀ ਕਰਨਾ ਟੀਏ ਦੀ ਕਰਨਾ ਸੱਚ ਬੋਲਣ ਲੱਗੇ ਨੂੰ ਇਹ ਐਦਾਂ ਦੇਖੋ ਫਿਰ ਇਹ ਨਹੀਂ ਸੱਚ ਬੋਲ ਸਕਦਾ ਪੌੜੀ ਮਨਮੁਖ ਮੋਹ ਮਾਇਆ ਲਾਗੇ ਛਿੰ ਮਾਰ ਪਛਾੜ ਸੀ ਭਾਏ ਦੂਜੇ ਠਾਗੇ ਮਨਮੁਖ ਕਾਲ ਵਿਆਪਦਾ ਮਨਮੁਖ ਨੂੰ ਕਾਲ ਵਿਆਪਦਾ ਉਹਨਾਂ ਦੇ ਅੰਦਰ ਕਲਪਨਾ ਕਾਲ ਵੇਪਨਾ ਕਲਪਨਾ ਵਧਦੀ ਜਾਂਦੀ ਹੈ ਮਾਇਆ ਦੀ ਭੁਗਵਧਦੀ ਜਾਂਦੀ ਹੈ ਉਹਨਾਂ ਦੀ ਇੱਛਾ ਨੂੰ ਵਧਦੀ ਜਾਂਦੀ ਹੈ ਛਾਂ ਮਾਇਆ ਲਾਡੇ ਮੋਾਇ ਜਿ ਲਗੇ ਇੱਛਾ ਨਾਲ ਕਿਤੇ ਮੁਗਦੀਆਂ ਨੇ ਕਿੱਛਾ ਪੂਰੀ ਹੋ ਜਾਂਦੀਆਂ ਫਿਰ ਮੈਂ ਮਾਰ ਪ੍ਰਚਾਰ ਸੀ ਪਾਇ ਦੂਜੇ ਠਾਗੇ ਜਿਹੜੇ ਦੂਜੇ ਪਾਇਦੇ ਕਿ ਠੱਗੇ ਹੋਏ ਨੇ ਮਾਇਆ ਦੀ ਦੌਰ ਚ ਪਏ ਹੋਏ ਨੇ ਉਹਦਾ ਕਾਲ ਨਹੀਂ ਹੈ ਇਹ ਇਹ ਦੌਰ ਪਏ ਉਹਦਾ ਕਾਲ ਨੂੰ ਮਾਲ ਨੂੰ ਗੱਲ ਹੀ ਨਹੀਂ ਇੰਚਰਿੰਗ ਮਾਪੜਾ ਦੇਖਾ ਜੀ ਆਏ ਖਿੰਨ ਮਹਿ ਮਾਰ ਪਿਛਾੜ ਸੀ ਜੇ ਦੂਜੇ ਦਾ ਸੱਚ ਵੀ ਝੂਠਾ ਉਹਦਾ ਦਾ ਜਿਹੜਾ ਧੰਨ ਝੂਠਾ ਖੇਤ ਵੀ ਝੂਠਾ ਸਭ ਕੁਝ ਹੈ ਪਿਛਾੜੇ ਜਾਣਾ ਜਰ-ਜਰ-ਕਿਆ ਜਾਉਂਦੇ ਨੇ ਸਾਬ ਮਾਰ ਕੇ ਪਿਛਾੜ ਕੇ ਪਰੇ ਮਾਰ ਦਾ ਸੱਤ ਹਾਂ ਜੀ ਵੇਦ ਵਿਲਾ ਹੱਥ ਨਾ ਆਵੇ ਜਮ ਡੰਡ ਲਾਗੇ ਤਿੰਨ ਜਮ ਡੰਡ ਨਾਲ ਜੋ ਹਰ ਲਿਵ ਜਾਗੇ ਫਿਰ ਵਿਲਾ ਹੱਥ ਨਾ ਆਵੇ ਫਿਰ ਵਿਲਾ ਹੱਥ ਹੁੰਦਾ ਜਮ ਕਾ ਡੰਡ ਤਾਂ ਲੱਗਣਾ ਹੀ ਆ ਝੂਠੇ ਜੋ ਝੂਠੇ ਬਾਦਲ ਚੱਲਗੇ ਜਿਹੜੇ ਝੂਠੇ ਡੰਡੇ ਤੋਂ ਨਹੀਂ ਬਚਿਆ ਜਾ ਸਕਦਾ ਸਾਕਦੇ ਮਾਰਗਾੜੇ ਪਰ ਸਕਦੇ ਨਹੀਂ ਜਮ ਡੰਡ ਨਾਲ ਲੱਗੀ ਉਹ ਹੰਦੇ ਬਿਨ ਲੱਗੇ ਤੇ ਪਾਸੇ ਲੇਨ ਅੱਗੇ ਰੂਲ ਜੰਮਦਾ ਜਾਂਦਾ ਲੱਗਦਾ ਨਹੀਂ ਸੱਚਿਆ ਗਿਆ ਨੂੰ ਤੇ ਜੰਮ ਕੇ ਡੰਡ ਤੋਂ ਭਾਵ ਕੀ ਬਣਦਾ ਜੀ ਜਮਾਵਾਂ ਤੇ ਜਮਨਾ ਦਾ ਜਮਨਾ ਅਗਲਾ ਜਨਮ ਮੈਨਾ ਅੱਛਾ ਜੀ ਸਭ ਤੇਰੀ ਤੁਦ ਛਡਾਵਣੀ ਸਭ ਤੁਦੈ ਲੱਗੇ ਸਭ ਤੇਰੀ ਤੋਂ ਵੀ ਜਨਾਵਣ ਸਾਰੀ ਗਲਤ ਤੇਰੀ ਹੋਈ ਐ ਟਾਈਮ ਚਲਾਉਣੀ ਤਉ ਦੁੱਧ ਲੈ ਲਾਂ ਤੇ ਸਾਰੇ ਤੈਨੂੰ ਨੇ ਤੇਰੇ ਨਾਲ ਨਾਲ ਲੱਗ ਕੇ ਕਰੋੜਾਂ ਚਿੱਤਾ ਰਾਹ ਹੀ ਦੱਸਿਆ ਗਿਆ ਸੀ ਰਾਹ ਹੋਰ ਹੋਰ ਦਾਸਤੇ ਦੁਨੀਆਂ ਹੋਰ ਹੋਰ ਦਾਸਤੇ ਇਹ ਵੀ ਸਪਸ਼ਟ ਰੀਤੀ ਕੀਤੀ ਸੀ ਸਰ ਵਾਜੀ ਇੱਥੇ 12ਵੀਂ ਪੌੜੀ ਸਮਾਪਤੀ ਹੈ ਜੀ